ਰੋਖ ਨੇ ਕਬੀਰ ਦੇ ਘਰ ਦੇ ਕਬੀਰ ਨਾਲ ਔਖੇ ਨੇ ਇਹ ਜਿਹੜਾ ਇਧਰ ਨੂੰ ਜਾਂਦਾ ਇਹਦੇ ਨਾਲ ਸੰਸਾਰੀ ਆਦਮੀ ਔਖੇ ਕਿਉਂਕਿ ਭਗਤਾਂ ਦੇ ਸਹਾਰਿਆਂ ਜੋੜ ਕਦੇ ਨਾ ਆਇਆ ਇਹਨਾਂ ਦੇ ਜੋੜੇ ਨਹੀਂ ਹੈ ਜਦੋਂ ਸਵਾਲ ਆ ਜੋੜ ਨਹੀਂ ਵਿਰੋਧ ਹੋ ਜਾਂਦਾ ਵਿਰੋਧ ਹੁੰਦਾ ਹੈ ਵਿਰੋਧ ਹੁੰਦਾਇਕ ਨਹੀਂ ਹੁੰਦਾ ਭਗਤਾਂ ਨੂੰ ਇਸ ਗੱਲ ਦੀ ਉਹਨਾਂ ਨੇ ਕਹਿੰਦੇ ਵੀ ਅਸੀਂ ਆਪਣਾ ਜੀਵਨ ਨਹੀਂ ਖਰਾਬ ਕਰਨਾ ਤੁਸੀਂ ਆਪਣਾ ਕਰਨਾ ਕਰ ਲਓ ਮੈਂ ਆਪਣਾ ਜੀਵਨ ਕਿਉਂ ਖਰਾਬ ਕਰਾਂ ਤੁਸੀਂ ਤਾਂ ਕਹਿੰਦੇ ਮੇਰਾ ਜੀਵਨ ਵੀ ਖਰਾਬ ਹੋ ਜਾਵੇ ਫਿਰ ਤੁਸੀਂ ਖੁਸ਼ ਹੋ ਤੁਸੀਂ ਆਪਣਾ ਕਰ ਲਓ ਮੇਰਾ ਕਦੇ ਕਰ ਦਿਓ ਮੈਂ ਕਦੇ ਕਰਾਂ ਪਰਫੈਕਟ ਤਾਂ ਨਹੀਂ ਮੈਂ ਕਹਿੰਦਾ ਵੀ ਤੁਸੀਂ ਮੇਰੇ ਨਾਲ ਆਓ ਵੀਰ ਕਹਿੰਦਾ ਹਮਰੇ ਖੋਜ ਪਰੋ ਮਤ ਕੋਈ ਜੋ ਮੈਂ ਖੋਜ ਕੀਤੀ ਉਹਦੇ ਪਿੱਛੇ ਨਾ ਲੱਗੋ ਮੈਂ ਕਹਿੰਦਾ ਸਾਰੇ ਮੇਰੇ ਮਗਰੋਂ ਅਸੀ ਕੋ ਜਬਰਦ ਜ਼ਬਰਦਸਤੀ ਸਿੱਖਣੀ ਪਾਉਣਾਗੇ ਸਾਨੂੰ ਇੱਛਾ ਵੀ ਨਹੀਂ ਰੱਖਣੀ ਅਸੀਂ ਸਾਰਿਆਂ ਨੂੰ ਸਿੱਖਾਉਣਾ ਹੈ ਗਾਲਾਂ ਜ਼ਰੂਰ ਸਿੱਖੀ ਦੀ ਕਰਨੀ ਗਾਲਾਂ ਸਿੱਖੀ ਦੀ ਕਰਨੀ ਹੈ ਤਾਂ ਕਿ ਝੂਠ ਦੀਆਂ ਦੁਕਾਨਾਂ ਵੱਧ ਹੋ ਜਾਣ ਗੁੰਮਰਾ ਕਰਨ ਵਾਲੇ ਲੋਕ ਗੁੰਮਰਾ ਨਾ ਵਰਤ ਕਰਨ ਸਿਰਫ ਇਸ ਕਰਕੇ ਕਰਨਾ ਇਹੀ ਬਰਬਕਾਰ ਹੈ ਜਿਹੜੇ ਗੁੰਮਰਾ ਕਰਨ ਵਾਲੇ ਨੇ ਉਹਨਾਂ ਨੇ ਤੁਹਾਡੇ ਖਿਲਾਫ ਖੜੇ ਹੋਣਾ ਲਾਮਵਾ ਦੋਣਾ ਨਹੀਂ ਕਰਨਾ ਉਰਵਾਂ ਕਰਨ ਵਾਲੇ ਨੇ ਉਰਵਾਂ ਦੇ ਖਿਲਾਫ ਗੁਮਰਾ ਕਰਨ ਵਾਲੇ ਕਾਜੀਰ ਮੁੱਲਾਂ ਦੀ ਫੌਜੀ ਨਾ ਪੰਡਤਰ ਮੁੱਲਾਂ ਦੀ ਫੌਜੀ ਅਨੰਦਪੁਰ ਸਾਹਿਬ ਪੰਡਤ ਦੇਲੇ ਸੀ ਆ ਮੁੱਲਾਂ ਦੇ ਚਲੇ ਸੀ ਭਾਈ ਧਾਰੀ ਪੰਡਤ ਦੇਲੇ ਸੀ ਮੁਸਲਮਾਨ ਮੁੱਲਾਂ ਦੇ ਚਲੇ ਸੀ ਇਹ ਦੋਏ ਖਿਲਾਫ ਨੇ ਆਪਰ ਵੀ ਕੀ ਝਗੜਦੇ ਨੇ ਦੇਖੋ ਦੋਏ ਤਾਂ ਮੁਝਾੜਦੇ ਨੇ ਪਰ ਜਦ ਤੀਜਾ ਇਹ ਖੜਾ ਹੁੰਦਾ ਹੈ ਦੋਹਾਂ ਨੂੰ ਖਤਮ ਕਰਨ ਵਾਲਾ ਤਾਂ ਦੋਏ ਇਕੱਠੇ ਹੋ ਕੇ ਦਿਖਲਾਉਂਦੇ। ਇਸੇ ਕਰਕੇ ਕਵੀ ਇਹ ਕਹਿੰਦਾ ਹਮਰਾ ਝਗੜਾ ਰਹਾ ਨਾ ਕੁ ਪੰਡਿਤ ਮੁੱਲਾ ਛਾੜ ਦੇ ਦੂ। ਪੰਡਿਤ ਮੁੱਲਾ ਦੋਏ ਵਿਦਵਾਨ ਨੇ। ਪੰਡਿਤ ਵਿਦਵਾਨ ਹੁੰਦਾ। ਮੁੱਲਾ ਕੀ ਹੁੰਦਾ? ਮੁੱਲਾ ਆਲਮ ਕਹਿੰਦਾ ਉਹ ਆਲਮ ਕਹਿੰਦੇ। ਆਲਮਰ ਵਿਦਵਾਨੇ ਕੋਈ ਉਹਨਾਂ ਦੀ ਭਾਸ਼ਾ ਜਾਲਮ ਕਹਿੰਦੇ ਨੇ। ਵਿਦਿਆ ਨੂੰ ਇਲਮ ਕਹਿੰਦੇ ਨੇ ਇਹ ਵਿਦਵਾਨ ਕਹਿੰਦੇ ਨੇ ਫਿਰ ਕੀ ਇਹ ਵਿਦਿਆ ਨਹੀਂ ਹੈ ਸਵਾਲ ਹੈ ਇਹ ਵੀ ਪੜ੍ਹਾਈ ਹੈ ਅੱਖਰ ਨੇ ਲੈਂਗੁਏਜ ਆਖਣ ਦੀ ਪਛਾਣ ਹੈ ਪੈਂਤੀ ਹੈ ਸਿਆਰੀਆਂ ਬਿਹਾਰੀਆਂ ਨੇ ਫਿਰ ਉਹ ਵਿਦਿਆ ਕਿਉਂ ਆਏ ਵਿਦਿਆਦਿਨ ਵਿਦਿਆ ਜਿਹੜੀ ਹੁੰਦੀ ਹੈ ਉਹ ਮੈਨ ਵੇਡ ਹੁੰਦੀ ਹੈ ਸੰਸਾਰੀ ਬੁੱਧੀ ਦੀ ਉਹ ਕੀ ਉਪਜਾ ਸੰਸਾਰੀ ਬੁੱਧੀ ਉਹੀ ਕੁਝ ਫਾਇਦਾ ਕਰ ਸਕਦੀ ਹੈ ਜੋ ਉਹਦੀ ਸ਼ਕਤੀ ਦੇ ਅੰਦਰ ਨੇ ਜੋ ਉਹਦੇ ਕੋਲ ਸ਼ਕਤੀਆਂ ਨੇ ਉਹਦੇ ਅੰਦਰ ਹੁੰਦੇ ਨੇ ਇਹਦੇ ਕੋਲ ਸ਼ਕਤੀਆਂ ਕੀ ਨੇ ਅੱਖਾਂ ਨੇ ਕੰਨ ਨੇ ਨੱਕ ਆ ਪੰਜ ਗਿਆਨ ਇੰਦਰੀ ਨੇ ਇਹਦੀ ਰੇਂਜ ਵਿੱਚ ਜਿਹੜਾ ਹੈਗਾ ਉੱਥੇ ਤੱਕ ਇਹਦੀ ਰੇਂਜ ਹੈਗੀ ਹੈ ਸੰਸਾਰੀ ਬੁੱਧੀ ਇਦੋਂ ਕਹਿੰਦੇ ਨੇ ਜਦ ਕਿ ਇਹ ਜਿਹੜਾ ਗਿਆਨ ਇਹ ਦੀ ਰੇਂਜ ਤੋਂ ਪਰੇ ਹੈ ਇਸ ਕਰਕੇ ਕਿ ਬ੍ਰਹਮ ਦਾ ਗਿਆਨ ਨਿਰਾਰਕਾਰ ਦੀ ਸੋਚੀਏ ਇਹਦਾ ਲੋ ਵਿਦਿਆਦ ਹੈਦਾ ਵਿਦਈ ਪਰ ਬ੍ਰਹਮ ਵਿਦਿਆ ਸਾਰੀ ਵਿਦਿਆ ਮਾਇਆ ਦੇ ਗਿਆਨ ਤੱਕ ਸੀਮਤ ਹੈ ਬ੍ਰਹਮ ਵਿਦਿਆ ਮਾਇਆ ਦਾ ਗਿਆਨ ਇਸ ਕਰਕੇ ਇਹਦੇ ਵਿੱਚ ਕਿਉਂਕਿ ਮਾਇਆ ਦੇ ਗਿਆਨ ਤੋਂ ਨਿਰਕਾਰ ਨੂੰ ਸਮਝਾਉਣਾ। ਜਿਵੇਂ ਦੋਦਿੱਕੇ ਉਹ ਕਹਿੰਦਾ ਮਾਇਆ ਦਾ ਗਿਆਨ। ਪ੍ਰਮਾਣ ਇਹਦਾ ਦਿੱਤਾ ਸਮਝਾਇਆ ਕੁਛ ਹੋਰ ਹੈ। ਜਿੱਤੇਜ ਪ੍ਰਮਾਣ ਨੇ ਉਹ ਵਿਦਿਆਦੇ ਨੇ ਸੋਚੀ ਕਰਾਈ ਹੋਈ ਹੈ। ਪ੍ਰਭੂ। ਵਿਦਿਆਦਿ। ਬ੍ਰਮਦਿ। ਇਹਨੂੰ سپورਟ ਵਾਸਤੇ ਵਰਦਿਆ ਸੰਸਾਰੀ ਸੱਚ ਨੂੰ मेरा कार्य सचदेव दर्शन दी स्पोर्ट वास्ते करते हैं और कोई तरीका है नहीं फिर भी जो ब्रह्म है ऐसी चीज कोई नहीं बाहर फिर भी ब्रह्मदा ठीक दर्शन हो नहीं सकता कहने वाली बात कही नहीं जा सकती क्योंकि चीज बाहर है नहीं जो मिसाल देने होता है नहीं बाहर ब्रह्म ਕੀ ਹੈ ਕਿਹਦਾ ਉਹੀ ਹੈ ਬ੍ਰह्म ਗਿਆਨ ਇਸ ਕਰਕੇ ਬ੍ਰह्म ਦੀ ਹੈ ਇਹਦੇ ਵਿੱਚ ਬ੍ਰह्म ਨਹੀਂ ਹੈ ਬ੍ਰह्म ਗਿਆਨ ਬ੍ਰਮ ਦੀ ਜਾਣਕਾਰੀ ਹੈ ਜਦੋਂ ਕਿ ਅਸੀਂ ਬ੍ਰह्म ਦੇ ਰੂਬਰੂ ਹੋਵਾਂਗੇ ਉਹਦੀ ਪਛਾਣ ਛੇਤੀ ਕਰ ਲਾਂਗੇ ਇਹਦੇ ਪਛਾਣ ਹੈ ਜੇ ਨਜਾਣਿਆ ਤੇਨੇ ਪਛਾਣ ਲਿਆ ਜੋ ਗੁੰਗੇ ਸਾਕਰ ਬਨ ਜੇ ਜੀਵ ਦੀ ਜਾਣਕਾਰੀ ਨਾ ਹੋਵੇ ਤਾਂ ਪਛਾਣੂਗਾ ਖਣੂ ਮਾਨੂੰ ਜਾਣਕਾਰੀ ਦਿੱਤੀ ਵੀ ਜਿਹੜੀ ਤੇ ਬੂਟੀ ਲੈ ਕੇ ਆਉਣੀ ਏ ਉਹ ਰੋਸ਼ਨੀ ਹੈ ਲਾਈਟ ਹੈ ਜਾਣਕਾਰੀ ਦਿੱਤੀ ਸੀ ਨਾ ਪਤਾ ਨਹੀਂ ਸੀ ਤਾਂ ਹੀ ਪਛਾਣਦਾ ਇਹ ਕਰਕੇ ਸਾਨੂੰ ਜਾਣਕਾਰੀ ਦਿੱਤੀ ਹੈ ਬ੍ਰਹਮ ਹੁੰਦਾ ਕੀ ਹੈ ਕਿੱਥੇ ਹੁੰਦਾ ਹੈ ਕਿਵੇਂ ਪ੍ਰਾਪਤੀ ਕਰਨੀ ਹੈ ਉਹ ਸਾਰੀ ਜਾਣਕਾਰੀ ਹੈ ਇਹਦੇ ਵਿੱਚ ਬ੍ਰਹਮ ਤਾਂ ਮਿਲੂ ਜਿੱਥੇ ਬ੍ਰਹਮ ਹੈ ਉੱਥੋਂ ਹੀ ਨਾਮ ਤਾਂ ਮਿਲੂ ਜਿੱਥੇ ਹੈ ਉੱਥੋਂ ਹੀ ਅੰਦਰੋਂ ਹੀ ਪਰ ਨਾਮ ਦੀਆਂ ਕਰਾਮਾਤਾਂ ਨਾਮ ਦੇ ਸਿੰਟਮ ਨਾਮ ਕਿਵੇਂ ਮਿਲੂ ਕਿਵੇਂ ਛੱਡਣਾ ਬਾਹਰ ਸੰਸਾਰ ਕਿਵੇਂ ਛੱਡਣਾ ਮਨ ਨੂੰ ਕਿਵੇਂ ਬਣਾਉਣਾ ਇਹ ਸਾਰੀ ਇਹਦੇ ਵਿੱਚ ਆ ਬੋਧਾ ਗਿਆਨ ਮਨ ਨੂੰ ਬਣਾਉਣ ਤੱਕ ਹੈ ਮਨ ਨੂੰ ਬਣਾਉਣ ਜਿਹੜੀ ਮਾਇਆ ਅਸੀਂ ਦੇਖਦੇ ਆ ਉਹ ਸਾਨੂੰ ਦੇਖਣ ਨੂੰ ਕੀ ਹੈ ਐਕਚੁਅਲੀ ਕੀ ਹੈ ਜਿਹੜੇ ਸੁੱਖ ਨੂੰ ਅਸੀਂ ਸੁੱਖ ਮੰਨਦੇ ਆ ਐਕਚੁਅਲੀ ਕੀ ਹੈ ਉਹਦਾ ਨੁਕਸਾਨ ਸਾਨੂੰ ਕੀ ਹੈ ਜਿਹਨੂੰ ਅਸੀਂ ਆਪਣੇ ਬੈਨੀਫਿਟ ਦੀਆਂ ਚੀਜ਼ਾਂ ਬਲਦੇ ਆ ਐਕਚੁਅਲੀ ਸਾਡੇ ਬੈਨੀਫਿਟ ਦੀ ਨਹੀਂ ਸਾਡੇ ਰੂਸਾ ਦੇ ਚਲੇ ਜੋ ਅਸੀਂ ਮਰਨੇ ਬੈਠੇ ਆ ਉਹ ਗਲਤ ਮੰਨੀ ਬੈਠੇ ਆ ਤੈਜੀ ਬਨ ਜਗ ਸਤਿ ਕੀ ਇਹ ਸਭ ਕੁਝ ਗੁਰਬਾਣੀ ਚ ਦੱਸਿਆ ਹੋਇਆ ਹੈ ਤਾਂ ਕਿ ਸਾਡਾ ਜਿਹੜਾ ਇਹਦੇ ਨਾਲ ਅਟੈਚਮੈਂਟ ਪੱਕੀ ਹੈ ਢਿੱਲੀ ਹੁੰਦੀ ਹੁੰਦੀ ਢਿੱਲੀ ਹੁੰਦੀ ਹੁੰਦੀ ਢਿੱਲੀ ਹੁੰਦੀ ਹੁੰਦੀ ਛੱਡੇ ਜਾਈਏ ਜਿਹੜਾ ਗੁਰਬਾਣੀ ਨੂੰ ਸਮਝਣਾ ਹੈ ਇਹ ਜਪਣਾ ਇਹ ਨੂੰ ਰੜਕਣਾ ਜਿਹੜਾ ਵਿਚਾਰ ਲੈ ਜਪਣਾ ਜਪ ਇਹ ਆ ਸਾਡਾ ਤਾਂ ਲਿਖਿਆ ਹੈ ਕਿ ਗੁਰਬਾਣੀ ਚ ਨਾਮ ਨਾਮ ਜਪਣ ਦਾ ਮਤਲਬ ਹੈ ਗੁਰਬਾਣੀ ਚ ਨਾਮ ਸਮਝ ਕੇ ਨਾਮ ਕੀਆ ਉਹਦੀ ਪ੍ਰਾਪਤੀ ਕਰਨੀ ਤਤ ਜਨ ਦੀ ਪ੍ਰਾਪਤੀ ਕਰਨੀ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਇਹ ਗੋਬਿੰਦ ਕੀ ਬਾਣੀ ਹੈ ਨਾ ਇਹ ਨੂੰ ਜਪਣਾ ਕੀ ਇਹਨੂੰ ਪੜੀ ਜਾਣਾ ਜੇ ਆਪਣੇ ਬਾਣੀ ਦਾ ਥੋੜਾ ਜਾਂ ਨਹੀਂ ਆਇਆ ਚੈਪਟਰ ਸਾਰੀ ਆ ਗਈ ਬਾਣੀ ਦਾ ਕੀ ਅਖੰਡ ਪਾਠ ਕਰਕੇ ਜਦ ਭੋਗ ਪੈ ਗਿਆ ਫਿਰ ਦੁਆ ਕਰ ਲਈਏ ਸ਼ੁਰੂ ਉਹ ਭੋਗ ਪੈ ਗਿਆ ਫਿਰ ਦੁਆ ਸ਼ੁਰੂ ਕਰ ਲਈਏ ਦੱਸੋ ਕਿਵੇਂ ਕਰੀਏ ਜਪ ਮੰਨ ਮੇਰੇ ਗੋਬਿੰਦ ਬਾਣੀ ਬਾੜੀ ਸਾਰੀ ਆ ਗਈ। ਪਕਤਾਂ ਦੇ ਵਿੱਚ ਛੱਡੀ ਨਹੀਂ ਹੋਈ, ਇਹ ਭੱਟਾਂ ਦੀ ਛੱਡੀ ਨਹੀਂ ਹੋਈ, ਕੋਈ ਸਾਰੀ ਇਕੱਠੀ ਆ ਗਈ। ਕੀ ਹੁਣ ਐਗਲੀ ਇਹ ਫਿਰ? ਫਿਰ ਉਹਨਾਂ ਨੇ ਕਾ ਵਿੱਚ ਇਹ ਤੈਅ ਕਰ ਲੱਗੇ ਹੋਣਗੇ। ਫਿਰ ਘੋੜ ਕੇ ਜਪਦੇ ਵਿੱਚ ਪੰਕਤੀ ਘੋੜ ਦੇਤੀ ਗੁਰਬਾਣੀ 'ਚ ਦੋ ਪੰਕਤੀਆਂ ਬਲਕੇ ਦਿੱਤੀਆਂ। ਐਸਾ ਗਿਆਨ ਜਪੋ ਮਨ ਮੇਰੇ नेडे आगे ਕੇ ਗੋ। ਗੁਰਬਾਣੀ ਜੋ ਜੋ ਗਿਆਨ ਹੈ ਉਹ ਸਮਝੋ। ਗਿਆਨ चीज ਵਾਲੀ ਚੀਜ਼ ਨਹੀਂ ਹੁੰਦੀ। ਗਿਆਨ ਗਿਆਨ ਗਿਆਨ ਗਿਆਨ ਗਿਆਨ ਗਿਆਨ ਕਰੀਏ। ਉਹ ਇੱਥੇ ਸੋਚਣਾ ਪਊਗਾ। ਵਿਚਾਰਨਾ ਪਊਗਾ। ਕਿ RAM RAM ਕਰੀਏ ਕਿ ਵੈਗਰੂ ਵੈਗਰੂ ਕਰੀਏ ਕਿ ਗਿਆਨ ਗਿਆਨ ਕਰੀਏ। ਇਹ ਵੈਗ ਵੀ ਜਪੋ ਕਿਤੇ ਨਹੀਂ ਆਇਆ RAM ਜਪੋ ਕਿਉਂ ਛੜਦਾ ਵੈਗ ਨੂੰ ਜਪੋ ਕਿਉਂ ਕਰ ਲਿਆ ਇਹ ਤੇ ਵੀ ਬਲੈਕ ਪੈਡ ਝੜਵੋ ਚੇ ਕੀਤਾ ਹੈ RAM ਜਪੋ ਜੀ ਐਸੇ ਐਸੇ ਇਹ ਤਾਂ ਬੋਲੇ ਜਿਸ ਤਰੀਕੇ ਨਾਲ ਜਪਿਆ ਜਾ ਰਿਹਾ ਬੰਦੇ ਜਪ ਰਿਹਾ ਐਸੇ ਨਹੀਂ ਜਪੋ ਹੋਰ ਕੇ ਸਹੀ ਜਪਿਓ ਹਰ ਜੈਸੇ ਅਗਰ ਕੀ ਹੈ ਤੇਨ ਦੇ ਆਲ ਪਰ ਉਸ ਤੇ ਤਰੇਸਾ ਪਰਵਾਰ ਚੜਾਇਆ ਬੈਠਾ ਜਾ ਭਾਵੇਂ ਤਾਂ ਹੁਕਮ ਹੈ ਅਸਲ ਕਿ ਹੁਕਮ ਮੰਨਣਾ ਜਿਹੜਾ ਹੈ ਉਹ ਰਾਮ ਜਪਣਾ ਐਸੇ ਕਿਹਨਾਂ ਰਾਮ ਜਪੋ ਜਿੱਦਾਂ ਤੁਸੀਂ ਹੁਕਮ ਪਾਣਾ ਮੰਨਣ ਲੱਗ ਜਓ ਥੋੜੀ ਜੇ ਇਹ ਗੱਲ ਹੈ ਤਾ ਸਾਰੀ ਗੁਰਬਾਣੀ ਜਪਣ ਦੀ ਗੱਲ ਵੀ ਠੀਕ ਆ ਗਈ ਤੇਰਾ ਅਰਥ ਆ ਗਿਆ ਇਹਦੇ ਪਾੜਾ ਮੰਨਨ ਨੂੰ ਕਿਹਾਏ ਐਸੇ ਗਿਆਨ ਜਪੇ ਵਰਵਾਰੀ ਵਾਲੀ ਪੰਕਤੀ ਵੀ ਠੀਕ ਆ ਗਈ ਤਿੰਨੇ ਪੰਕਤੀਆਂ ਦਾ ਅਰਥ ਇਕੱਲਿਆ ਗੁਰਬਾਣੀ ਵਿੱਚ ਗਿਆਨ ਸੁਭਾਇ ਨਾਮ ਸੁਭਾਇ ਨਾ ਗਿਆਨ ਨਾ ਕੋਈ ਗਿਆਨ ਪਦਾਰਥ ਸੁਨਾ ਹੈ ਗਿਆਨ ਪਦਾਰਥੇ ਨਾ ਨਾ ਗਿਆਨ ਦਾ ਬੰਦਾ ਬਲ ਰਹਾ ਗਿਆਨ ਨਾ ਹੋਏ ਸਾਰੀਆਂ ਬੰਤੀਆ ਇੱਕੋ ਹੀ ਇਸ਼ਾਰਾ ਕਰਦੀ ਰਹੇ ਜੋ ਕੁਰਬਾਨੀ ਦਾ ਗਾਰ ਹੈ ਜੋ ਕੁਰਬਾਨੀ ਸੋਜੀ ਦਿੱਤੀ ਹੋਈ ਹੈ ਉਹ ਸੋਜੀ ਪ੍ਰਾਪਤ ਕਰੋ ਤਾਂ ਕਿ ਬੁੱਤੀ ਦਾ ਲੈਵਲ ਉਸ ਲੈਵਲ ਤੱਕ ਚਲਿਆ ਜਾਵੇ ਜਿੱਤੇ ਤੱਕ ਬਬੇ ਨੇ ਬਦਲ ਲੈ ਬਦਲਦੀ ਕਦ ਹੈ ਜੇਕਰ ਬੁੱਧ ਬਦਲੀ ਬਦਲਦੀ ਕਦ ਹੈ ਬੁੱਧੀ ਦੀ ਸੋਚ ਬਦਲ ਜਾਂਦੀ ਹੈ ਦੁਨੀਆਬੀ ਜਿਹੜਾ ਵਿੱਚ ਫਸੀ ਹੋਈ ਹੈ ਲੋਕ ਦੇ ਦੁਨੀਆਬੀ ਇੱਛਾਵਾਂ ਦੇ ਇਹ ਛੱਡ ਨਹੀਂ ਦਿੰਦੀ ਦੁਨੀਆ ਦਾ ਜਿਹੜਾ ਸਾਡੇ ਨਾਲ ਅਟੈਚਮੈਂਟ ਹੈ ਇਹ ਜੰਜੀਰਾਂ ਨੇ ਸੰਸਾਰ ਨਾਲ ਸਾਡੀਆਂ ਅਟੈਚਮੈਂਟ ਦੀਆਂ ਜਿੰਨਾ ਜਿਹੜੇ ਜੰਜੀਰਾਂ ਕਾਇਮ ਰਹਿਣਗੀਆਂ ਉਹਨਾਂ ਚਿਤ ਸੰਸਾਰ ਲੋ ਡਿਟੈਚਮੈਂਟ ਨਹੀਂ ਹੋ ਸਕਦੀ ਕਿਸੀ ਸੰਸਾਰ ਨੂੰ ਛੱਡ ਨਹੀਂ ਸਕਦੇ ਸੰਸਾਰ 'ਚ ਫਸੇ ਰਹੋਗੇ ਆਪਣੇ ਹੱਥ ਨਾਲੇ ਜੰਜੀਰਾਂ ਕੱਟਣੀਆਂ ਨੇ ਜੀਰਾ ਕੀਨੇ ਨਾਨਕ ਔਗਣ ਗੇਤੜੇ ਤੇ ਤੇ ਬਣਈਂ ਇਹ ਔਗਣ ਨੇ ਜੀਰਾ ਨੇ ਲੋਭ ਔਗਣੇ ਉਹ ਔਗਣੇ ਕ્રોਧ ਔਗਣੇ ਸਾਰੇ ਔਗਣ ਇਹ ਕੱਟਣੇ ਕਬਨੇ ਜੇ ਗੁਣ ਹੋਊ ਤਾਂ ਕੱਟੀਆਂ ਨੂੰ ਤੇ ਭਾਗੀ ਸੇ ਗੁਲਾ ਨਾਲ ਕੱਟ ਹੋਣੀਆਂ ਨੇ गुण की ਹੁੰਦੇ ਨੇ ਜੇ ਗੁਣ ਗੁਰਬਾਣੀ ਦੇ ਅਨੁਸਾਰ ਚੱਲੀਏ ਤਾਂ ਉਹ ਗੁਣ ਗੁਣੋ ਜਿਤ हो ਹੋ ਜਾਂਦੇ ਉਹ ਉਹ ਗੁਣ ਸਾਡੇ ਗੁਣ ਸੀਗੇ ਸਾਡੇ ਚ ਉਹ ਗੁਣ ਗੜ ਗਏ ਪਹਿਲੇ ਗੁਣ ਸੀਗੇ ਜਦ ਇੱਕ ਸੀ ਸੱਚਖੰਡ ਵਿੱਚ ਸੀ ਜਦ ਗੁਣ ਠੀਕ ਹੈ ਠੀਕ ਸੀ ਉਹ ਗੁਣ ਗੜ ਗਏ ਅੱਤੇ ਅੱਤੇ ਕਿ ਅੱਧਾ ਫਲ ਗੜ ਗਿਆ ਤਾਂ ਹੈਗਾ ਬੈਰ ਵਿਰੋਧ ਕਰਨ ਲੱਗਿਆ ਮਨ ਦੇ ਲੈਵਲ ਤੇ ਧੀਰਵਾ ਧੀਰ ਸंसार ਨਾਲ ਜੁੜ ਕੇ ਬੈਰ ਵਿਰੋਧ ਪੈ ਗਿਆ ਨਿਰਵੈਰਤਾ ਇਹਨੇ ਖਤਮ ਕਰ ਲਈ ਨਿਰਵੈਰਤਾ ਚਾਹੀਦੀ ਹੈ ਜੇ ਸੰਸਾਰ ਨਾਲ ਅਟੈਚਮੈਂਟ ਕਰ ਲਵੇ ਬੈਰ ਵਿਰੋਧ ਇੱਥੇ ਹੀ ਰਹਿ ਜਾਂਦਾ ਇਹ ਕੋਈ ਬਹਿਰੀ ਬਗਾਨਾ ਹੀ ਨਹੀਂ ਹੈ ਬੈਰ ਵਿਰੋਧ ਕਰੋ ਕਿਦਰ ਮਜਬੂਰੀ ਹੈ ਬੈਰ ਵਿਰੋਧ ਛੱਡਣਾ ਵੀ ਇਹਦੀ ਮਜਬੂਰੀ ਹੈ ਇਹ ਸ਼ਰਤ ਜੇ ਜਾਣੇ ਸਾਝਕੰਡ ਆਪਣੇ ਕਾਰhetra ਬੈਰ ਵਿਰੋਧੋਂ ਕੋਪਾ ਛੱਡ ਬੈਰ ਵਿਰੋਧ ਕਾਮ ਵਿਰੋਧ ਲੋਭੋ ਝੂਠ ਬੇਕਾਰ ਭਾਲੋ ਸ੍ਰੋਪ ਇਹ ਆਹੂ ਜੁਗਤ ਬਿਆਨੇ ਕਈ ਜਨ ਨਾਨਕ ਆਖ ਲਿਓ ਆਪਣ ਕਰ ਕਰ ਇਹ ਹੁਣ ਇਹਨਾਂ ਤੋਂ ਬਚਾਲਾ ਮੈਨੂੰ ਸਾਰਿਆਂ ਤੋਂ ਤਾਂ ਮੇਰਾ ਰੱਖਿਆ ਹੈ ਵਰਨਾ ਰੱਖਿਆ ਜੰਤੋਂ ਮੇਰੀ ਕੋਈ ਨਹੀਂ ਜਦ ਤੇ ਜਾਣ ਕਿ ਕੋਈ ਰੱਖਣ ਨਹੀਂ ਮੈਂ ਨਹੀਂ ਛੱਡ ਸਕਦਾ ਇਥੇ ਕਿਹਾ ਛੱਡਣਾ ਚਾਹੇ ਆਪੇ ਨਾਨਕ ਆਖ ਲਿਓ ਆਪਣ ਕਰ ਅੰਦਰਲੇ ਨੂੰ ਕਹੋ ਵੀ ਤੂੰ ਰੱਖਿਆ ਕਰ ਤੇਰੇ ਸਹਾਰੇ ਨਾਲ ਛੱਡ ਸਕਦਾ ਜੇ ਤੂੰ ਬਾਹ ਫੜੇ ਫਿਰ ਮੈਂ ਛੱਡ ਦਉ ਜਿੰਨਾ ਜਰ ਦੁਆ ਕੁਝ ਮਿਲਦਾ ਨਹੀਂ ਲੱਡੂ ਹੱਥ 'ਚ ਪਹਿਲਾਂ ਛੱਡਿਆ ਨਹੀਂ ਜਾਂਦਾ ਛੱਡਿਆ ਨਹੀਂ ਜਾਂਦਾ ਬਸ ਆ ਉਹ ਜਿਹੜਾ ਸਹਾਰਾ ਉਹਦਾ ਉਹ ਆ ਮਾਇਆ ਤਾਂ ਛੁੱਟਦੀ ਹੈ ਜੋ ਹੱਥ ਫੜਾਵੇ ਬਾਹ ਦੇ ਬਾਹ ਦੇ ਬਾਪ ਜਦੋਂ ਉਹ ਬਾਹ ਦਊਗਾ ਇਹਨੂੰ ਕੁਝ ਇਦਰੋਂ ਪ੍ਰਾਪਤ ਹੋਊਗਾ ਜ਼ਿਆਦਾ ਹੋ ਗਿਆ ਮੈਨੂੰ ਛੋੜੀ ਦਿੱਤੇ ਛੱਡ ਦਿੰਦਾ ਘੱਟ ਕੀਮਤੀ ਚੀਜ਼ ਆਪਾਂ ਛੱਡ ਦਿੰਦੇ ਆ ਇਹ ਚਾਂਦੀ ਦੇ ਕਿਸੇ ਨੂੰ ਕਹਿਣ ਦੀ ਜਗ੍ਹਾ ਸੋਨੇ ਦੇ ਕਹਿਣੇ ਮਿਲ ਜਾਣ ਚਾਂਦੀ ਦੇ ਘੜੇ ਦੀ ਜਗ੍ਹਾ ਸੋਨੇ ਦਾ ਚਾਂਦੀ ਦਾ ਘੜਾ ਉਹ ਮਾਰਦਾ ਮੈਨੂੰ ਕਹਿੰਦਾ ਸੋਨੇ ਦਾ ਲੈ ਲੈ ਜਾਂਦੀ ਦਾ ਪਰ ਕਿਰਦਪੂਰ ਘਰੇ ਜਿਹੜਾ ਕਹੂ ਮੈਂ ਨਹੀਂ ਲੈਂਦਾ ਇਹ ਲੋਭ ਹੈ ਲੋਭ ਇਹਨੂੰ ਐਡਾ ਬੜਾ ਦੇ ਦਿੱਤਾ ਅਸਲ ਉਹ ਸੱਚਾ ਲੋਭ ਦਿੱਤਾ ਇਹ ਝੂਠਾ ਲੋਭ ਉਹ ਚੀਜ਼ ਕੋ ਵਾਲੀ ਹੈ ਰਹਿਣ ਵਾਲੀ ਸਾਰੀ ਗੱਲ ਸਮਝਾ ਕੇ ਮੰਨੂ ਜਦ ਸਭ ਜਾਂਦਾ ਪੇਸ਼ਟ ਜਿੰਨਾ ਜਰ ਭਰੋਸਾ ਨਹੀਂ ਕਰਦਾ ਛੱਡਦਾ ਹੈ ਨਹੀਂ ਹੈ ਜਿਵੇਂ ਇੱਥੇ ਕਰਾਉਂਦੇ ਨੇ ਇਹ ਭਰੋਸਾ ਕਰਦਾ ਕਿ ਇੱਥੇ ਧੋਖੇ ਬੜੇ ਖਾਦੇ ਨੇ ਧੋਖਾ ਨਹੀਂ ਲੱਗੇ ਕਿੰਨੇ ਬੈਠੇ ਲਿਕਦੀਆਂ ਮਤਾਂ ਸਭ ਧੋਖੇ ਨੇ ਬਹੁਤ ਇਹਨੇ ਧੋਖੇ ਖਾਦੇ ਨੇ ਇਹ ਜਿਹੜਾ ਅੱਛਾ ਉਹਦਾ ਦੁੱਧਾ ਜੜਿਆ ਨਾ ਲਸੀ ਦੇ ਵੀ ਫੁੱਕਾ ਮਾਰਦਾ ਫਿਰ ਹਰ ਜਗ੍ਹਾ ਨੂੰ ਲੱਗਦਾ ਵੀ ਸ਼ਾਇਦ ਧੋਖਾ ਹੋਵੇ ਕਿਤੇ ਛੱਡਣ ਨਾ ਛੱਡਣ ਦਾ ਕਾਰਨ ਵੀ ਹੈ ਕਿ ਇੱਥੇ ਧੋਖੇ ਬਹੁਤ ਨੇ ਧਰਮ ਦੇ ਨੁਕਤੇ ਇੱਕ ਗੱਲ ਇਹ ਵੀ ਹੋ ਸਕਦਾ ਹੈ ਲੋਭ ਵੀ ਹੈ ਛੱਡਣ ਦੀ ਦੰਦਾ ਉਹ ਵੀ ਹੈ ਛੱਡਣ ਦੀ ਦੰਦਾ ਇਹ ਜਿਹੜੇ ਬੁਕਾਰ ਨੇ ਇਹ ਅਸਾਦ ਬੁਕਾਰ ਨੇ ਅਸਾਦ ਬੁਕਾਰਾਂ ਦੀ ਸਜਣਾ ਕਰਨਾ ਤਾਂ ਪਤਾਨੀ ਕਿੰਨੇ ਜਨ ਮੁਸਾਦਨਾ ਕਰਦਾ ਰਿਹਾ ਉਹਦਾ ਰਿਜ਼ਲਟ ਕੋਈ ਨਹੀਂ ਹੋਇਆ ਇਹਨੂੰ ਮਿਲਿਆ ਕੋਈ ਨਹੀਂ ਕਿੰਨੀ ਦਫਾ ਇਹਨੇ ਭਗਤੀਆਂ ਕੀਤੀਆਂ ਉਹਦਾ ਫਲ ਕੋਈ ਨਹੀਂ ਇਸ ਕਰਕੇ ਸੰਸਾਰੀ ਲਾਭ ਵਾਲੀ ਭਗਤੀ ਨੂੰ ਤੇ ਛੇਤੀ ਬਦਲ ਲੈਂਦਾ। ਉਹ ਤੋ ਮਿਲ ਜਾਂਦਾ। ਉਹ ਜਿਹੜਾ ਗਾਹਾਂ ਵਾਲਾ ਲਾਭ ਹੈ ਉਹ ਤੇ ਵਿਸ਼ਵਾਸ ਘੱਟ ਕਰਦਾ। ਸੰਸਾਰੀ ਲਾਭ ਵਾਲੀ ਜਿਹੜੀ ਗੱਲ ਉਹ ਵੀ ਛੇਤੀ ਬਣ ਜਾਂਦੀ ਸੰਸਾਰੀ ਲਾਭ ਦਿਖਾਇਆ ਹੈ ਜੀਵਨ ਭਗਤੀਆਂ ਨੇ ਸਾਰਿਆਂ ਨੇ ਉਹ ਤੂੰ ਫਿਰ ਹੁਜ ਜਾਂਦਾ ਨਾਮ ਉਹਨੂੰ ਇਹਦੇ ਵਿਚੇੜਾ ਨਾਮ ਹੈ ਉਹ ਚਾਨਣ ਚਾਨਣ ਨਾਮ ਤੇਰਾ ਸਿਰਨਾਠ ਚਾਨਣ ਚਾਨਣ ਜਦ ਹੁੰਦਾ ਜਿੱਤੇ ਹੁੰਦਾ ਨੇਰਾ ਉਥੇ ਹੁੰਦਾ ਹੀ ਨਹੀਂ ਦੇ ਰਾ ਕੀ ਹੈ ਭਰਮ ਨਾਮ ਕੀ ਹੈ ਚਾਨਣ ਅਸਲ ਚ ਚਾਨਣ ਦੀ ਲੋੜ ਸੀ ਇਹਨੂੰ ਚਾਨਣ ਅੰਦਰ ਬਾਹਰ ਵੀ ਬਾਹਰ ਵੀ ਚਾਨਣ ਹੈ ਬਾਹਰ ਦੇ ਚਾਨਣ ਦੀ ਲੋੜ ਕੋਰਵੇਂ ਨੂੰ ਕੋਹਰ ਅਧਾਰ ਜੈਸਾ ਚੰਦਾ ਉਗਬਾ ਸੂਰਜ ਚੜੇ ਹਜ਼ਾਰ ਇਤੇ ਚੰਨ ਹੁੰਦੇ ਗੁਰਮੁਨ ਨੋ ਨੋ ਕੀ ਹੋ ਰਹਾ ਤੁਹਾਨੂੰ ਵਿਅਕਤੀ ਕੀ ਕਰੂ ਵਿਅਕਤੀ ਬਾਹਰ ਜੇ ਵਿਅਕਤੀ ਕਰਦਾ ਫਿਰ ਨਾਨਕ ਸਾਰਿਆਂ ਨੂੰ ਚੱਲਣ ਕਰਦਾ ਬਰਬੇ ਹਾਜੀ ਉੱਤੇ ਵੀ ਅਸੀਂ ਅਰਥ ਜਾਣ ਕੇ ਉਲਟੇ ਕੀਤੇ ਹੁੰਦੇ ਜਗ ਚੱਲਣ ਹੋਆ ਤਾਂ ਵਾਲੇ ਅਰਥਾਂ ਦੀ ਜਗ੍ਹਾ ਵਿਅਕਤੀ ਵਾਲੇ ਅਰਥ ਲਾਤੇ ਇੱਥੇ ਜਾਂਦੇ ਪਰ ਅਰਥ ਲਾਤੇ ਔਰ 4:00 ਵਜੇ ਲਾਇਆ ਉਹਨਾਂ ਨੂੰ ਪਤਾ ਸੀ ਜਿਹਨੇ ਲਵਾਇਆ ਸੀ ਸਾਨੂੰ ਨਹੀਂ ਪਤਾ ਜੈ ਇਰੇ ਨੇ ਛਲਾਤ ਕਰ ਦਿੱਤੀ ਆਪਣੀ ਕਰਕੇ ਅਸੀਂ ਆਪਣੇ ਉਹਨਾਂ ਦੇ ਪਿੱਛੇ ਲੱਗ ਗਏ ਹੁਣ ਜਿਹੜੀ ਹਾਲਤ ਹੈਗੀ ਪਤਾ ਨਹੀਂ ਸਾਨੂੰ ਕੀ ਹਾਲਤ ਹੈ ਸਰ ਇਹ ਹਾਲਤ ਸਾਨੂੰ ਮਿਸਗਾਈਡ ਕਰਤਾ ਔਰ ਮਿਸਗਾਈਡ ਅਸੀਂ ਹੋ ਗਏ ਅਸੀਂ ਪਿੱਛੇ ਮੁੜ ਫਿਰ ਗੁਰਬਾਨੀ ਦੇ ਟੇਕ ਰੱਖੀ ਜਿੰਨਾ ਚਿਰ ਗੁਰਬਾਨੀ ਦੇ ਟੇਕ ਨਹੀਂ ਆਉਂਦੀ ਇਹ ਦੇ ਚਾਹੀ ਹਿਰ ਹੋਏ ਹੋਏ ਕੋਈ ਇਲਾਜ ਨਹੀਂ ਸਾਡੇ ਕੋਲ ਹੈ ਨਕਸ਼ਾ ਸਾਡੇ ਕੋਲ ਹੈ ਨਕਸ਼ੇ ਤੇ ਵੀ ਵਿਸ਼ਵਾਸ ਨਹੀਂ ਕਰਦੇ ਰਾਹ ਹੀ ਭੁੱਲੇਗੇ ਦੱਸੋ ਕਿਵੇਂ ਠੀਕ ਹੋਵੋ ਨਕਸ਼ਾ ਖੋਲ ਕੇ ਦੇਖਦੇ ਨਹੀਂ ਰਾਹ ਹੀ ਭੁੱਲ ਗਏ ਜੰਗਲ ਦੇ ਰੁਲ ਗਏ ਸਿੱਧਾ ਰਸਤੇ ਕਿਵੇਂ ਹੋਗੇ ਪਾਰਕ ਮੇ ਰਹਿਣਾ ਲਖਸ਼ਾਤ ਨਾ ਬਾਸਿਕ ਕੋਈ ਗੱਲ ਹੈ ਲਖਸ਼ਾ ਪੁਰਣਾ ਪਊ ਔਰ ਦੇਖਣਾ ਪਊਗਾ ਜੀ ਰਸਾਰ ਹੋਣਾ ਦੇਖ ਲਓ ਜੀ ਨੇ ਇੱਥੇ ਰਹਿਣਾ ਮੌਜਾ ਇੱਥੇ ਤਾਂ ਹੋ ਜਾਈ ਹੋ ਜਾਣੇ